ਸ਼ਲੋਕ ਮਹੱਲਾ ਪੰਜਵਾਂ ਸੇਵਕ ਸੱਚੇ ਸਾਖੇ ਸਹੀ ਪ੍ਰਵਾਨ ਦੂਜਾ ਸੇਵਨ ਨਾਨਕਾ ਸੇ ਪਚ ਪਚ ਮੂਏ ਅਜਾਨ ਸੇਵਕ ਸੱਚੇ ਸਾਖ ਸਾਦੇ ਜਿਹੜੇ ਸੇਵਕ ਨੇ ਸੱਚੇ ਸਾਦੇ ਉਹਦਾ ਪ੍ਰਵਾਨ ਨਰਗਾ ਹੋਰ ਕਿਹਦੇ ਕਿਸ ਨੂੰ ਜਲਨ ਲਾਉਂਦੇ ਨੇ ਸੇਵਾ ਕਰਦੇ ਨੇ ਕਿਸੇ ਨੇ ਨਾ ਥਾਲੇ ਖੋਲੇ ਹੋਏ ਨੇ ਉਹ ਦਰਗਾਹ ਪਰਵਾਨੀ ਪਰਵਾਨ ਜਿਹੜੀ ਹੈ ਦੂਜਾ ਸੇਵਨ ਨਾਨਕਾ ਸੇ ਪੱਛ ਪੱਛ ਮੁਏ ਜਾਣ ਹੋ ਸਕਦਾ ਉਹਨਾਂ ਨੂੰ ਸੇਵਾ ਜੀਰ ਦੀ ਸੇਵਾ ਤੁਸੀਂ ਕਰਦੇ ਹੋ ਉਹਨਾਂ ਨੂੰ ਦਰਗਾਹ ਤੋਂ ਸਜਾ ਦਿੱਤੀ ਹੋਵੇ ਤੁਸੀਂ ਉਹਨਾਂ ਦੀ ਸੇਵਾ ਕਰਕੇ ਉਹਨਾਂ ਦੀ سزا ਘਟਾਉਂਦੇ ਹੋ ਉਹ ਦੁੱਖ ਮਹੱਲਾ ਪੰਜਵਾਂ ਜੋ ਧੁਰ ਲਿਖਿਆ ਲੇਖ ਪ੍ਰਭ ਮਿਟਣਾ ਨਾ ਜਾਏ ਜੋ ਧੁਰ ਪ੍ਰਭ ਦਰਗਾਹ ਲੇਖ ਲਿਖਿਆ ਗਿਆ ਮਿਟਿਆ ਨਹੀਂ ਜਾ ਸਕਦਾ ਚਾਹੇ ਉਹ ਪ੍ਰਭ ਨੇ ਲਿਖਤਾ ਚਾਹੇ ਇਹਨੇ ਲਿਖਤਾ ਪ੍ਰਭ ਵੀ ਤਾਂ ਕੁਝ ਲਿਖਦਾ ਹੈ ਇਹਦੇ ਬਾਰੇ ਇਹ ਵੀ ਲਿਖਿਆ ਆਪਣੇ ਬਾਰੇ ਠੀਕ ਹੈ ਜਾ ਸਕਦਾ ਰਾਮ ਨਾਮ ਤਨ ਵੱਖਰੋ ਨਾਨਕ ਸਦਾ ਧਿਆਏ ਆਪ ਲੋਗ ਸਦਾ ਧਿਆਏ ਵਖਰਾ ਤਾਂ ਨਾਮ ਦੇ ਵਿੱਚ ਦੂਤ ਦਾ ਉਹਦੇ ਵਿੱਚ ਨਾਨਕ ਰਾਨ ਆਂ ਤਨ ਹੈਗਾ ਸਾਡੇ ਕੋਲੋ ਧਿਆਨ ਰੱਖਣਾ ਚਾਹੀਦਾ ਤਨ ਕਰਦਾ ਵਾਅਦਾ ਜੇ ਧਿਆਨ ਰੱਖੀਏ ਤਾਂ ਵਾਅਦਾ ਹੈ ਧਿਆਨ ਨਾ ਰੱਖੀਏ ਘਟ ਜਾਂਦਾ ਵਿਸਰ ਜਾਂਦਾ ਠੀਕ ਹੈ ਜੀ पौडी महला पंचवां नारायण लाया ना पैर किथे रखै करदा पाप अमितयां नित विसोचक है ना ठुखड़ा दा ठुखड़े के देखणा आया था कह लो थोड़ा जा चख के देखया जो उगल ला के लाया जो ठुखड़ा है लाया थु, ना ठुखड़ा पैर किथे ਪੈਰ ਕਿੱਥੇ ਰੱਖੇ ਕਿੱਥੇ ਪੈਰ ਰੱਖੇ ਉਹਨੇ ਵਿਆਹ ਦੀ ਲਾਈ ਹੈ ਇੱਥੋਂ ਪਰੇ ਪਰੇ ਨਹੀਂ ਰੱਖਣਾ ਵਿਆਹ ਦੇ ਤੱਕ ਇੱਥੋਂ ਪਰੇ ਉਰੇ ਨਹੀਂ ਹੋਣਾ ਚਾਹੀਦਾ ਤਾਂ ਹੋਰ ਕਿੱਥੇ ਰੱਖੇ ਪੈਰ ਉੱਥੇ ਰੱਖਣਾ ਪਊਗਾ ਲਾਈਨ ਤੋਂ ਇਹ ਦੂਦਰ ਦੀ ਪੈਰ ਦੀ ਗੇਰ ਸਕਦੇ ਐਦਰ ਉਧਰ ਪੈਰ ਗਿਰ ਤੁਹਾਡੀ ਜੁਲਵਾੜੀ ਦਾ ਜਾਣ ਉਹ ਜਿਹੜੀ ਬ੍ਰੀਕ ਲਾਈਨ ਗੁਰਬਾਣੀ ਦੇ ਦਿੱਤੀ ਹੈ ਜੇ ਆ ਗਈ ਨਾ ਪਹਿਲ ਤੇ ਥੱਲੇ ਫੇਰ ਤਾਂ ਪਾਪ ਸਾਗਰ ਬੋਹ ਸਕਦਾ ਨਹੀਂ ਕੀ ਅਸੀਂ ਬੰਦਾਂ ਦੇ ਸੁੱਕਣਾ ਲਗਾਇਤਾ ਪਤਾ ਪੋਜੰਦੀ ਕਾਇਆ ਗਲਤ ਹੈ ਅੱਛਾ ਆਵਾਜ਼ ਤਾਂ ਧਰੋਣੀ ਹੋ ਰਹੀ ਹੈ ਉਹ ਪਾਸੇ ਤਾਲ ਰੱਖਦੇ ਵੇ ਇਹ ਲੈਫਟ ਵਾਲੇ ਪਾਸੇ ਪੈਰ ਰੱਖ ਲੈ ਕਰਦਾ ਪਾਪ ਅਮਿੱਤਿਆ ਨਿਤ ਵਿਸਤੋ ਚਖੈ ਵਿਰਤ ਪਾਪ ਕਰਦਾ ਰੋਜ ਵਿਛਤ ਚਖੈ ਲੈ ਰਿਹਾ ਆਪ निंदा ਕਰਦਾ ਪਛਮੂਆ ਵਿੱਚ ਦੇਹੀ ਭੱਖੇ ਸੱਚੇ ਸਾਹਿਬ ਮਾਰਿਆ ਕੌਣ ਤਿਸ ਨੂੰ ਰੱਖੇ ਦੇਹ ਦੇ ਕੱਟੀ ਆਹ ਮਿੱਟੀ ਆ ਚੰਗੀ ਦੀਆਂ ਮਾੜੀਆਂ ਇਦਾਂ ਵੀ ਕਰਦਾ ਰਿਹਾ ਖਾਂਦਾ ਵੀ ਰਿਹਾ ਉਹ ਵੀ ਕਰਦਾ ਰਿਹਾ ਨੋਤਾ ਵੀ ਕਰਦਾ ਰਿਹਾ ਖਾਣਾ ਲਈ ਕੀਤੀ ਪੇਚ ਪਖੜਾ ਵੀਰੇ ਪਖਣਾ ਖਾਣੇ ਨੂੰ ਕਹਿੰਦੇ ਨੇ ਸੱਚੇ ਸਾਹਿਬ ਮਾਰਿਆ ਕੌਣ ਤਿਸ ਨੂੰ ਮਾਰਤਾ ਇਹਦਾ ਇਹ ਨੂੰ ਕਲਪੀੜੇ ਚਲਾਤਾ ਇਹਦਾ ਪ੍ਰਕਾਰ ਦੇ ਜ਼ਹਿਰ ਬਣਾਤੇ ਤੇ ਪੋਚੇ ਨੂੰ ਜੋਬਰ ਜੀ ਕਾਈ ਜਾ ਸੰਸਾਰ ਚ ਵੇਖਾ ਪੂਰ ਜਿੰਦਾ ਸੱਚੇ ਵਾਲਾ ਸੰਸਾਰ ਚ ਵੇਖਾ ਮਾਨਕ ਤੇ ਸ਼ਰਨਾਗਤੀ ਜੋ ਪੁਰਖ ਲਖੇ ਰੋੜ ਕਾ ਨਾ ਪਰਉਦੀ ਛਲਨਾਗ ਤੇ ਜਾਣਾ ਪੈਂਦਾ ਜੋ ਪੁਰਖ ਅਲਖ ਹੈ। ਉਹ ਅਲਖ ਪੁਰਖ ਉਹਦੀ ਛਲਨਾ ਵਿਦਿਆਉ। ਉਹਨੂੰ ਪੁੱਛੋ ਠੀਕ ਕੀ ਹੈ ਗਲਤ ਕੀ ਹੈ। ਗਲਤ ਕੀ ਹੈ ਠੀਕ ਕੀ ਹੈ ਅਸੀਂ ਰਹੇ ਹਾਂ ਲੈਵਲ ਤੇ। ਉਹ ਸਾਰੇ ਫੈਸਲੇ ਸਹੀ ਗਲਤ। ਸਾਡੂ ਕੋਈ ਚੀਜ਼ਾਂ ਚੰਗੀਆਂ ਲੱਗਦੀਆਂ ਸੀਆਂ, ਸੌਂ ਲੱਗਦੀਆਂ ਸੀਆਂ। ਕੋਈ ਚੱਲੇ ਨਹੀਂ ਲੱਗਦੀਆਂ ਸੀਆਂ ਸਾਡੇ ਲੈਵਲ ਦੀ ਗਲਤੀ। ਸਾਡੀ ਇਹ ਵੀ ਬਕੀਆਂ ਸੀ। ਕੋਈ ਵੀ ਨਹੀਂ ਸੀ ਉਹਨਾਂ ਚ। ਉਹ ਫੇਰੋਥੀ ਆਪਰ ਦਾ ਜੋ ਬਣਾਈ ਕਰਦੇ ਜਨਮ ਚਦ ਸਾਹਿਬ ਮਹਾਰਾਜ ਜੀ ਉਦੋਂ ਚਿਰ ਬਣ ਬਣਉਦੇ ਰਹਣਗੇ ਲੋਕਤਬ ਨੇ ਫੇਰ ਆ ਜੂਗਾ ਉਹਨਾਂ ਤੇ ਕਹਾ ਨਾ ਨੰਬਰ ਤੇ ਕਹਾ ਦੂਜਾ ਬਤਨ ਹੋਰੀ ਉਹ ਤਾਂ ਫੇਰ ਲਹੂਰ ਦਾ ਸੱਚਾ ਪੁਰਖ ਮਾਰ ਦਊਗਾ ਮਾਰ ਦਊਗਾ ਜਾਂ ਇੱਕ ਰਹਿ ਜੂਗਾ ਜਿਉਂਦਿਆਂ ਦੇ ਕਦੇ ਕੋਈ ਭੋਜਨ ਨਹੀਂ ਹੈ ਉਪਰਗਿਆਨੀਆਂ ਦਾ ਭੋਜਨ ਗਿਆਨ ਉਹ ਉਹ ਬਚਾਣ ਉਹ ਸਾਰਿਆਂ ਨੂੰ ਵਿਖਿਆ ਕਹਿ ਦਿੰਦੇ ਠੀਕ ਹੈ ਜੀ ਉਹਦੇ ਨਾਲ ਜੋ ਕੁਝ ਵਧੀ ਖਾਣਾ